ਜਿਸ ਬੁਲਤ ਮੁਖ ਪਵਿੱਤ ਹੋਏ ਸਿੱਖ ਧਰਮ ਦੇ ਮੁਢਲੇ ਸੂਲ ਹਨ ਗੁਰਮੁਖ ਨਾਮ ਦਾਨ ਇਸ਼ਨਾਨ ਭਾਵਨਾਮ ਜਪਣਾ ਧਰਮ ਦੀ ਕੀਰਤ ਕਰਨੀ ਤੇ ਧਰਮ ਦੀ ਕੀਰਤ ਵਿੱਚੋਂ ਦਸਵੰਨ ਕੱਢ ਕੇ ਵੰਡ ਛਕਣਾ ਇਨ੍ਹਾਂ ਵਿੱਚੋਂ ਸਭ ਤੋਂ ਸ਼੍ਰੇਸ਼ਟ ਕੰਮ ਸਿੱਖੀ ਵਿੱਚ ਨਾਮ ਜਪਣਾ ਮੰਨਿਆ ਗਿਆ ਹੈ ਸਰਬ ਧਰਮਾਂ ਵਿੱਚ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰਬਾਣੀ ਵਿੱਚ ਫਰਜਤ ਨਾਮ ਜਪਣ ਦੇ ਸੰਦਰਭ ਵਿੱਚ ਆਉਂਦਾ ਹੈ ਤਾਂ ਕੇਵਲ ਗੁਰਮੰਤਰ ਰੂਪ ਵਾਹਿਗੁਰੂ ਨਾਮ ਜਪਣ ਦੇ ਅਰਥ ਹੀ ਰੱਖਦਾ ਭਾਈ ਗੁਰਦਾਸ ਜੀ ਦਾ ਬਚਨ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਗੁਰਬਾਣੀ ਦਾ ਇਹ ਸਿਧਾਂਤ ਹੈ ਕਿ ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਇੱਕ ਦੂਜੇ ਵਿੱਚ ਭੇਦ ਹਨ ਨਾਵੇਂ ਅੰਦਰ ਹਉ ਵਾਸਾ ਨਾਉ ਵਸੈ ਮਨ ਆਈ ਆਪ ਨਿਰੰਕਾਰਾ ਸੋ ਜਦ ਕੋਈ ਇੱਕ ਮਨ ਚਿਤ ਹੋ ਕੇ ਨਾਮ ਜਪਦਾ ਹੈ ਤਾਂ ਮਨ ਪ੍ਰਭੂ ਦੀ ਹਾਜ਼ਰੀ ਵਿੱਚ ਹੁੰਦਾ ਹੈ ਅਤੇ ਵਾਹਿਗੁਰੂ ਨਾਲ ਸੰਗਤ ਕਰ ਰਿਹਾ ਹੁੰਦਾ ਹੈ ਇਸ ਤਰ੍ਹਾਂ ਅਭਿਆਸ ਕਰਕੇ ਫਿਰ ਮਨ ਨੂੰ ਹਜ਼ੂਰੀ ਦੀ ਪੱਕੀ ਸੰਗਤ ਪ੍ਰਾਪਤ ਹੁੰਦੀ ਹੈ ਜਿਸ ਨੂੰ ਦੂਸਰੇ ਅਖਰਾਂ ਵਿੱਚ ਨਾਮ ਹਿਰਦੇ ਵਿੱਚ ਵਸ ਜਾਣਾ ਕਹਿੰਦੇ ਹਨ ਇਸ ਤਰ੍ਹਾਂ ਕਰਦੇ ਕਰਦੇ ਹੀ ਫਿਰ ਨਾਮ ਰਸ ਪ੍ਰਾਪਤ ਹੁੰਦਾ ਹੈ ਅਤੇ ਪਰਮੇਸ਼ਰ ਦੇ ਗੁਣ ਦਇਆ ਧਰਮ ਸਤ ਸੰਤੋਖ ਗਿਆਨ ਨਿਰਭਉ ਨਿਰਵੈਰਤਾ ਹਿਰਦੇ ਵਿੱਚ ਵਸ ਜਾਂਦੇ ਹਨ। ਅਤੇ ਅੰਤ ਨੂੰ ਪਰਮੇਸ਼ਰ ਨਾਲ ਅਪੇਜਤਾ ਹੋ ਜਾਂਦੀ ਹੈ। ਵਿਗਿਆਨ ਦੀ ਪਕੜ ਕਿਉਂਕਿ ਕੇਵਲ ਪਦਾਰਥ ਤੱਕ ਹੈ ਚਾਹੇ ਉਹ ਸੂਖਸ਼ਮ ਤੋਂ ਸੂਖਸ਼ਮ ਹੋਵੇ ਜਾਂ ਵੱਡੇ ਤੋਂ ਵੱਡਾ ਹੋਵੇ। ਪਰਮਾਤਮਾ ਤੇ ਉਸ ਦਾ ਨਾਮ ਪਦਾਰਥ ਨਹੀਂ। ਇਸ ਲਈ ਉਹ ਵਿਗਿਆਨ ਦੀ ਪਕੜ ਤੋਂ ਬਾਹਰ ਦੀ ਗੱਲ ਹੈ। ਗੁਰਬਾਣੀ ਅਨੁਸਾਰ ਸਾਰਾ ਸੰਸਾਰ ਤੇ ਆਉਣ ਦਾ प्रयोजन ਕੇਵਲ ਇੱਕ ਨਾਮ ਹੈ। पही प्रापत मानुख दे हुरिया गोविंद मिलन की एह तेरी बरिया अवर काज तेरे किते ना काम मिल साथ संगत पज केवल नाम गुरुदेव जी ने वाहेगुरु देव मिलाप ले की तरीका अपनाया जावे आप आप ही प्रश्न करके उतर दिता प्रश्न कवन संयोग मिलो प्रभु अपने उत्तर पल पल निमख सदा हर दुनिया दे होर कर्म धर्म पूजा अर्चा संजम व्रत तीर्थे स्नान दान पुण्य आद नाम दी बराबरी नहीं कर सकदी हर बिन अवर क्रिया वरथे जपतव संजम कर्म कमाणे ए ऊरे मूसे रहआव नेम संजम में रहता तिनका आढ न पाया आगे चलना और है भाई ऊहा कामना आया तीर्थ न अर धरनी प्रमथा आगे ठावर न पावै ਉਹਾਂ ਕਾਮਨਾ ਆਵੇ ਇਹ ਵਿਦ ਉਹ ਲੋਗ ਨਹੀਂ ਪਤੇ ਆਵੇ ਚਤੁਰ ਬੇਦਮੁਖ ਬਚਨੀ ਉਚਰੈ ਆਗੇ ਮਹੱਲ ਨਾ ਪਾਵੇ ਬੂਝੈ ਨਾਹੀ ਇੱਕ ਸੁਦਾਖਰ ਉਹ ਸਗਲੀ ਝਾਕ ਚਖਾਈਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰਗ੍ਰਾਮੀ ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੁ ਹੁਗਮਾਨੀ ਨਾਮ ਜਪਣ ਦੀਆਂ ਨੀਕਾਂ ਅਵਸਥਾਵਾਂ ਹਨ ਪਰ ਸ਼ੁਰੂ ਵਿੱਚ ਪਹਿਲਾ ਨਾਮ ਜਾ ਪ੍ਰਸਨਾ ਨਾਲ ਕਰਨਾ ਹੈ ਰਸਨਾ ਜਪੀਐ ਏਕ ਨਾਮ ਈहां ਸੁਖ ਆਨੰਦ ਕਾ ਨਾ ਅਗੈ ਜੀ ਕੈ ਸੰਕਾਮ ਹੋਰ ਤ ਕੁਝ ਫਰਮਾਉਂਦੇ ਹਨ ਰਸਨਾ ਨਾਮ ਜਪੋ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵੋ ਹੋਰ ਸ਼ਬਦ ਵਿੱਚ ਫਰਮਾਉਂਦੇ ਹਨ ਰਸਨਾ ਜਪਤੀ ਤੂੰ ਹੀ ਤੂੰ ਮਾਤ ਗਰਭ ਤੂੰ ਹੀ ਮ੍ਰਿਤ ਮੰਡਲ ਇਕ ਤੂੰ ਹੋਰ ਸ਼ਬਦ ਵਿੱਚ ਫਰਮਾਉਂਦੇ ਹਨ ਇਹ ਰਸਨਾ ਜਪ ਗੋਬਿੰਦ ਮੇਰੀ ਜਿੰਦੜੀ ਏ ਜਪ ਹਰ ਹਰ ਕ੍ਰਿਸ਼ਨਾ ਜਾਏ ਰਾਮ ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ ਇੱਕ ਜੀਵ ਨਹੀਂ ਬਲਕਿ ਲੱਖਾਂ ਜੀਵਾਂ ਹੋਵਣ ਤੇ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰ ਨਾਮ ਜਪਿਆ ਜਾਏ ਤਾਂ ਪਰਮੇਸ਼ਰ ਨਾਲ ਇੱਕਮਿਕ ਹੋ ਕੇ ਮਿਲਾਪ ਹੁੰਦਾ ਹੈ ਇੱਕ ਦੂਜੀ ਬੋ ਲੱਖ ਹੋ ਲੱਖ ਹੋ ਵਹਿ ਲੱਖ 20 ਲੱਖ ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਕਿਹੜੀ ਹੈ ਹੋਈ 21 ਨਾਲ ਹੀ ਪਰਮੇਸ਼ਰ ਨੂੰ ਬੇਨਤੀ ਕਰਦੇ ਹਨ ਲਾਖ ਜੇਵਾ ਦੇਵੋ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਅਤੇ ਜੋਰਸਨਾ ਨਾਮ ਨੇ ਜਪਦੀ ਉਸ ਨੂੰ ਫਟਕਾਰਾਂ ਪਾਈਆਂ ਹਨ ਰਸਨਾ ਜਾਪਿਆ ਇਹਨਾਂ ਨਾਮ ਤਿਲ ਤਿਲ ਕਰ ਕਟਿਏ ਰੇ ਜੇਹਵਾ ਕਰੂੰ ਸਤਖੰਡ ਨਾ ਜਾਮ ਨਾ ਉਚਰਸ ਸ੍ਰੀ ਗੋਬਿੰਦ ਰਸਨਾ ਨਾਲ ਜਪਿਆ ਨਾਮ ਜਦ ਹਿਰਦੇ ਵਿੱਚ ਵਸ ਜਾਏ ਤਾਂ ਇਹੋ ਸਿਮਰਨ ਬਣ ਜਾਂਦਾ ਹੈ ਜਿਸ ਦੀਆਂ ਬਰਕਤਾਂ ਦਾ ਕੋਈ ਅੰਦਾਜ਼ਾ ਹੀ ਨਹੀਂ ਸੁਖਮਨੀ ਸਾਹਿਬ ਦੀਆਂ ਪਹਿਲੀਆਂ ਅਸ਼ਟਪਦੀਆਂ ਸਿਮਰਨ ਦੀ ਮਹਿਮਾਨ ਨਾਲ ਪਰਪੂਰ ਹਨ ਸਾਰੀ ਬਾਣੀ ਨਾਮ ਜਪਣ ਦਾ ਉਪਦੇਸ਼ ਦੇ ਰਹੀ ਹੈ ਅਤੇ ਜੋ ਨਹੀਂ ਜਪਦੇ ਉਹਨਾਂ ਨੂੰ ਫਟਕਾਰਾਂ ਪਾ ਰਹੀ ਹੈ ਇਸ ਤਰ੍ਹਾਂ ਫਰਮਾਉਂਦੇ ਹਨ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਕ ਤ੍ਰਿਕ ਅਸਨੇ ਹੋ ਰਹਾਉ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੁੱਕਰ ਜੁੱਠਣ ਮੈਂ ਪਾਏ ਨਾਮ ਬਿਨਾ ਜੀਤਾ ਬਿਵਹਾਰ ਜਿਉ ਮਿਰਤਕ ਮਿਥਿਆ ਸੀਗਾਰ ਨਾਮ ਬਿਸਰ ਕਰੇ ਰਸਪੋਗ ਸੁਖ ਸੁਪਨੇ ਨਹੀਂ ਤਨ ਮਹਿ ਰੋਗ ਨਾਮ ਤਿਆ ਕਰੇ ਅਨਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗਮਨ ਪ੍ਰੀਤ ਨ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾਰਾਦਾ ਚੋਰ ਕੀ ਨਈ ਜਮ ਪ੍ਰਬੰਧ ਲੱਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦੇ ਸਾਡੇ ਦੇਸ਼ ਦੇ ਬਾਕੀ ਧਰਮਾਂ ਅਤੇ ਸਿੱਖ ਧਰਮ ਦਾ ਫਰਕ ਹੀ ਇਹ ਹੈ ਕਿ ਬਾਕੀ ਧਰਮ ਬਾਹਰमुखी ਕਰਮਕੰਡ ਵਿੱਚ ਫਸੇ ਹੋਏ ਹਨ ਅਤੇ ਗੁਰੂ ਘਰ ਵਿੱਚ ਪ੍ਰਧਾਨਤਾ ਨਾਮ ਦੀ ਹੀ ਹੈ ਨਾਨਕ ਕਹਿ ਕਰ ਕੇਵਲ ਨਾਮ ਅੰਗ 1136 ਸਾਰੀ ਬਾਣੀ ਨਾਮ ਜਪਣ ਦਾ ਸੁਨੇਹਾ ਦੇ ਰਹੀ ਹੈ ਨਾਮ ਜਪਣ ਦਾ ਫਾਇਦਾ ਤੇ ਨਾਮ ਜਪਣ ਦਾ ਨੁਕਸਾਨ ਅਤੇ ਨਾ ਜਪਣ ਦਾ ਨੁਕਸਾਨ ਦੱਸ ਰਹੀ ਹੈ नाम जपन ਵਾਲਾ ਹੀ ਹਰੀ ਨੂੰ ਪਾਉਂਦਾ ਹੈ ਅਤੇ ਗੁਰੂ ਨੂੰ ਚੰਗਾ ਲੱਗਦਾ ਹੈ ਵਾਹੋ ਵਾਹੋ ਗੁਰ ਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੋ ਵਾਹੋ ਪਾਵੈ ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੀੜ ਨਾ ਆਵੇ ਅੰਗ 515 ਗੁਜਰੀ ਕੀ ਵਾਰ ਵਿੱਚ ਵਾਹੋ गुरु ਵਾਹਿਗੁਰੂ ਵਾਹਿਗੁਰੂ ਕਰਨ ਦੇ ਇੰਨੇ ਫਾਇਦੇ ਦੱਸੇ ਹਨ ਕਿ ਜਿਸ ਦਾ ਕੋਈ ਅੰਤ ਨਹੀਂ ਇੱਥੋਂ ਤੱਕ ਕਿ ਵਾਹੋ ਵਾਹੋ ਕਰੇ ਸਈ ਜਨ ਸੋਹਣੇ ਅੰਗ 514 ਹੋਰ ਸਭ ਕਰਮ ਨਾਮ ਦੇ ਅਧੀਨ ਹਨ ਜੈਸੇ ਧਰਤੀ ਸਾਦੇ ਬਹੁ ਵਿਦ ਜੈਸੇ ਧਰਤੀ ਸਾਦੇ ਬਹੁ ਵਿਦ ਬਿਨ ਬੀਜੇ ਨਹੀਂ ਜਾਮੈਂ ਅੰਗ 1205 ਜਿਸ ਤਰ੍ਹਾਂ ਧਰਤੀ ਤੇ ਹਲ ਚਲਾਓ ਸੁਹਾਗਾ ਦੇਓ ਪਾਣੀ ਲਾਓ ਗੋਡੀ ਕਰੋ ਵਾੜ ਕਰੋ ਪਰ ਜੇ ਬੀਜ ਨਹੀਂ ਪਾਇਆ ਤਾਂ ਸਭ ਨਸਫਲ ਹੈ ਪਰ ਜੇ ਬੀਜ ਪਾ ਕੇ ਇਹ ਕੰਮ ਕਰੇ ਜਾਣ ਫਸਲ ਅਸੀ ਹੁੰਦੀ ਹੈ ਇਸੇ ਤਰ੍ਹਾਂ ਦਾਨ ਪੁੰਨ ਇਸ਼ਨਾਨ ਤੇ ਹੋਰ ਸਭ ਕਮ ਕੀਤੇ ਜਾਣ ਪਰ ਨਾਮ ਦਾ ਬੀਜ ਹਿਰਦੇ ਵਿੱਚ ਨਹੀਂ ਵਸਾਇਆ ਤਾਂ ਫਲ ਨਹੀਂ ਲੱਗੇਗਾ ਪਰ ਜੇ ਨਾਮ ਜਪ ਕੇ ਨਾਲੇ ਕੰਮ ਕੀਤੇ ਜਾਣ ਤਾਂ ਨਾਮ ਛੇਤੀ ਹਿਰਦੇ ਵਿੱਚ ਵੱਸਦਾ ਹੈ ਇਹ ਉਪਰਲੀ ਵਿਚਾਰ ਗੁਰੂ ਦੀ ਮਤ ਹੈ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਹੈ ਜਨ ਨਾਨਕ ਕਹੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਅੰਗ 670 ਹੋਣਸੀ ਇੱਕ ਧਰਮ ਨੂੰ ਵਿਗਿਆਨਕ ਧਰਮ ਕਹਿਣ ਵਾਲਿਆਂ ਦੇ ਵਿਚਾਰ ਪਾਠਕਾਂ ਕੇ ਰੱਖਦੇ ਹਾਂ ਇਹਨਾਂ ਦਾ ਕਾਮਰੇਡੀ ਵਿਚਾਰ ਦਾ ਟੋਲਾ ਤਾਂ ਮੂੰਹ ਨਾਲ ਨਾਮ ਜਪਣ ਨੂੰ ਮੂਲੂ ਹੀ ਨਾ ਕਰਦਾ ਹੈ ਜਿਸ ਤਰ੍ਹਾਂ 13 ਦਸੰਬਰ 2007 ਨੂੰ ਭਾਸ਼ਾ ਵਿਭਾਗ ਵਿੱਚ ਮੇਰੇ ਨਾਲ ਗੱਲਬਾਤ ਵਿੱਚ ਇੰਦਰ ਸਿੰਘ ਕੱਗਾ ਨੇ ਕਹਿ ਦਿੱਤਾ ਸੀ ਕਿ ਅੱਖਾਂ ਮੀਟ ਕੇ ਨਾਮ ਜਪਣ ਵਾਲੇ ਸੰਤਾਂ ਨੇ ਸਾਨੂੰ ਕੀ ਦਿੱਤਾ ਹੈ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰਨ ਨੂ ਪਸ਼ੂ ਦੀ ਉਗਾਲੀ ਕਰਨਾ ਆਖਦੇ ਹਨ ਨਾਲ ਹੀ ਪਾਈ ਗੁਰਦਾਸ ਦੀ ਬਾਣੀ ਦੇ ਉਦਾਹਰਣ ਦਿੰਦੇ ਹਨ ਖਾਂਡ ਖੰਡ ਕਹਿਤ ਜੀਭੋ ਨ ਸਵਾਦ ਮਿੱਠੋ ਆਵੈ ਸੰਤਾਂ ਦੇ ਗੌਤਕਪੰਨਾ 63 ਹੁਣ ਜਿਹੜਾ ਬੰਦਾ ਪਰਮੇਸ਼ਰ ਦੇ ਨਾਮ ਨੂੰ ਨਿਰਜਿੰਦ ਖੰਡ ਨਾਲ ਤੁਲਨਾ ਦੇਵੇ ਉਸ ਦੀ ਅਕਲ ਨੂੰ ਕੀ ਕਹੀਏ ਪਈ ਗੁਰਦਾਸ ਜੀ ਨੇ ਇਸ ਵਈਏ ਵਿੱਚ ਤਤ ਜੋ ਗਾੜੀ ਹੈ ਉਹ ਇਸ ਤਰ੍ਹਾਂ ਹੈ ਪਹਿਨਾ ਖੰਡ ਅਗ ਬੱਦਲ ਦਰਭ ਚੰਦਨ ਚੰਦ ਦੀ ਧਾਰਨ ਦਿੱਤੀ ਹੈ ਕਿ ਇਨ੍ਹਾਂ ਚੀਜ਼ਾਂ ਦੇ ਖਾਲੀ ਜ਼ਬਾਨ ਨਾਲ ਨਾਉ ਲੈਣ ਨਾਲ ਇਨ੍ਹਾਂ ਚੀਜ਼ਾਂ ਦੇ ਗੁਣਾਂ ਦਾ ਫਾਇਦਾ ਨਹੀਂ ਮਿਲਦਾ ਇਸੇ ਤਰ੍ਹਾਂ ਤੈਸੇ ਗਿਆਨ ਗੋਸ਼ਟ ਕਰਤ ਨ ਰਹਿਤ ਪਾਵੇ ਕਰਨੀ ਪ੍ਰਧਾਨ ਭਤ ਉਦਤ ਆਕਾਸ਼ ਹੈ ਖਾਲੀ ਗਿਆਨ ਗੋਸ਼ਟੀਆਂ ਅੱਜ ਕੱਲ ਦੇ ਵਿਦਵਾਨਾਂ ਦੇ ਸੈਮੀਨਾਰ ਅਤੇ ਚਰਚਾਵਾਦ ਨਾਲ ਕੁਝ ਪ੍ਰਾਪਤ ਨਹੀਂ ਹੋਵੇਗਾ ਜਦ ਤੱਕ ਗੁਰਮਤਿ ਅਨੁਸਾਰ ਕਰਮ ਨਹੀਂ ਕੀਤੇ ਜਾਂਦੇ ਭਾਵ ਨਾਮ ਜਪਿਆ ਨਹੀਂ ਜਾਂਦਾ ਇਸੇ ਭਾਈ ਸਾਹਿਬ ਦਾ ਨਾਮ ਇੱਥੇ ਭਾਈ ਸਾਹਿਬ ਦਾ ਨਾਮ ਜਪਣ ਨਾਲ ਮਤਲਬ ਨਹੀਂ ਹੈ ਬਲਕਿ ਖਾਲੀ ਗਿਆਨ ਚਰਚਾ ਦਾ ਭੇਦ ਦੱਸਿਆ ਹੈ ਖੰਡ ਨਰਜਿੰਦ ਦੇ ਨਾਮ ਰਟਣ ਨਾਲ ਮੂੰਹ ਮਿੱਠਾ ਨਹੀਂ ਹੋਵੇਗਾ ਇਹ ਇੱਕ ਮੂਰਖ ਨੂੰ ਵੀ ਪਤਾ ਹੈ ਖੰਡ ਨੂੰ ਪਰਮਾਤਮਾ ਦੇ ਨਾਮ ਨਾਲ ਤੁਲਨਾ ਦੇਣੀ ਇਸ ਤੋਂ ਵੱਡੀ ਮੂਰਖਤਾ ਹੈ ਜਦ ਕਿ ਗੁਰਬਾਣੀ ਦੱਸ ਰਹੀ ਹੈ ਹਰਕਾ ਨਾਮ ਮਿੱਠਾ ਅਤ ਹਰਕਾ ਨਾਮ ਮਿੱਠਾ ਅਤ ਰਸ ਹੋਏ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਹਰ ਨਾਮ ਅੰਮ੍ਰਿਤ ਹੈ दारू ਇਹੋ ਲਾਏ ਹੋ ਅੱਗੇ ਹੋਰ ਸ਼ਬਦ ਸੁਰਮਾਉਂਦੇ ਹਨ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਗੱਲ ਕਹੀ ਜਾਂਦੀ ਹੈ ਹਨ ਜਾਪ ਕੇ ਜਪਾਏ ਤੇ ਜੋ ਪਾਈਏ ਅ ਜਾਪਨਾਤ ਪੂਤਨ ਸੁਦੀਪ ਤੂੰ ਉਚਰਤ ਹੈ ਇੱਥੇ ਵੀ ਦਸ਼ਮੇਸ਼ ਜੀ ਨੇ ਦੋ ਡੂੰਗੇ ਵਿਚਾਰ ਦਿੱਤੇ ਉਨਨ ਲਈ ਜੋ ਡੰਕੀ ਦੀ ਚੋਟ ਨਾਖਦੇ ਹਨ ਕਿ ਆਸਨ ਲਗਾ ਕੇ ਇੰਨੀਆਂ ਮਾਲਾਵਾਂ ਫੇਰਨ ਨਾਲ ਪ੍ਰਮਾਤਮਾ ਮਿਲ ਜਾਏਗਾ ਦੂਸਰੇ ਪਸ਼ੂ ਵਰਤੀ ਨਾਲ ਮੂਹ ਪਪੀਹੇ ਵਾਂਗ ਤੂੰ ਤੂੰ ਕਰੀ ਜਾਣਾ ਮਨ ਕਿਤੇ ਹੋਰ ਪਟਕ ਰਿਹਾ ਹੋਵੇ ਜਾਂ ਪ੍ਰਭੂ ਤੇ ਸ਼ਰਧਾ ਵਿਸ਼ਵਾਸ ਤੇ ਭਰੋਸਾ ਹੀ ਨਾ ਹੋਵੇ ਤਾਂ ਵੀ ਇਹ ਇੱਕ ਲੋਕ ਦਿਖਾਵਾ ਬਣ ਕੇ ਰਹਿ ਜਾਵੇਗਾ ਜ਼ੁਬਾਨ ਨਾਲ ਬੋਲ ਕੇ ਕੰਨ ਨਾਲ ਸੁਣ ਕੇ ਹਿਰਦੇ ਵਿੱਚ ਵਸਾਉਣਾ ਹੈ ਸੰਸਾਰ ਦੇ ਸਿਆਣਿਆਂ ਨੇ ਇਹ ਦੇ ਵਿੱਚ ਵਸਾਉਣ ਲਈ ਸਭ ਤੋਂ ਉੱਤਮ ਤਰੀਕਾ ਵਾਰ-ਵਾਰ ਦੁਹਰਾਓ ਨੂੰ ਮੰਨਿਆ ਹੈ। ਸੰਗੀਤ ਦੀ ਸਰਗਮ ਸਾ ਰੇ ਗਾ ਮਾ ਪਾ ਧਾ ਨੀ ਸਾ। ਦੀਆਂ ਸੱਤ ਸੁਰਾਂ ਜੇ ਦੇਖਿਆ ਜਾਵੇ ਕੋਈ ਅਰਥ ਨਹੀਂ ਨਿਕਲਦੇ ਪਰ ਸਹੀ ਤਰਕੇ ਤਰੀਕੇ ਨਾਲ ਵਾਰ-ਵਾਰ ਅਭਿਆਸ ਨਾਲ ਰਾਗੀ ਦੇ ਗਲੇ ਵਿੱਚ ਸੁੰਦਰ ਰਾਗ ਨਿਕਲਦੇ ਹਨ। ਇਸੇ ਤਰ੍ਹਾਂ ਤਬਲੇ ਦੇ ਬੋਲ ਧਾ ਤਿੰਨ ਤਿੰਨ ਤਾ ਆਦਾ ਕੋਈ ਮਤਲਬ ਨਹੀਂ ਮਿਲਦਾ। ਪਰ ਇਹਨਾਂ ਬੋਲਾਂ ਦੇ ਬਾਰ ਬਾਰ ਦੇ ਨਾਲ ਤਾਲ ਦੇ ਗੁਰ ਤੇ ਜਦ ਤਬਲਜੀ ਥਾਪ ਦਿੰਦਾ ਹੈ ਇੱਕ ਰਸ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਦੇ ਚਾਰ ਅੱਡਾ ਡੱਖਰਾਂ ਦਾ ਕੋਈ ਮਤਲਬ ਨਹੀਂ ਪਰ ਗੁਰਮਤ ਅਨਸਾਰ ਇਸ ਦੇ ਵਾਰ-ਵਾਰ ਜਪਣ ਨਾਲ ਅਨੰਤ ਸੁਖ ਪ੍ਰਾਪਤ ਹੁੰਦਾ ਹੈ ਇਹ ਇਹ ਰਸ ਪਰਮੇਸ਼ਰ ਦੇ ਹੁਕਮ ਅnder ਉਹਨਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਕਾਰਨਾ ਕਾਲੀ ਹੈ ਉਹ ਚਾਹੇ ਭਾਈ ਵੀਰ ਸਿੰਘ ਜੀ ਸਨ ਜਾਂ ਭਾਈ ਰਣਜੀਤ ਸਿੰਘ ਜੀ ਜਾਂ ਸੰਤ ਬਾਬਾ ਅਤਰ ਸਿੰਘ ਜੀ ਮਸਤ ਹੋਣਾ ਸਭ ਨੂੰ ਪ੍ਰਾਪਤ ਹੋਇਆ ਤੇ ਸਾਰਿਆਂ ਨੇ ਇਕਮੁੱਠ ਹੋ ਕੇ ਸਤਿਗੁਰੂ ਜੀ ਦੇ ਬਚਨਾਂ ਦੀ ਹਾਮੀ ਭਰੀ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ ਅੰਗ 1300 ਸਿੱਖ ਧਰਮ ਨੂੰ ਵਿਗਿਆਨਕ ਧਰਮ ਕਹਿਣ ਵਾਲੇ ਮਿਸ਼ਨਰੀ ਵੀਰ ਇਹ ਤਾਂ ਮੰਨਦੇ ਹਨ ਕਿ ਨਾਮ ਮਨ ਵਿੱਚ ਵਸਾਉਣਾ ਹੈ ਪਰ ਮਨ ਵਿੱਚ ਕਿਵੇਂ ਬਸੇਗਾ ਇਸ ਦਾ ਕੋਈ ਹੱਲ ਨਹੀਂ ਦੱਸਦੀ। ਅਖੇ ਪੌੜੀ ਦੇ ਪਹਿਲੇ ਦੂਸਰੇ ਡੰਡੇ ਤੇ ਪੈਰ ਨਹੀਂ ਧਰਨਾ ਟਿਸ਼ੀ ਤੇ ਪਹੁੰਚਣਾ ਹੈ। ਸ਼ਾਇਦ ਕੋਈ ਕੈਫਸਲ ਜਾਂ ਗੋਲੀ ਇਹਨਾਂ ਨੇ ਕੱਢੀ ਹੈ ਜਿਸ ਦੇ ਖਾਣ ਨਾਲ ਨਾਮ ਮਨ ਵਿੱਚ ਵਸ ਜਾਂਦਾ ਹੈ। ਇੱਕ ਦੂਸਰਾ ਤਬਕਾ ਪ੍ਰਚਾਰ ਰਿਹਾ ਹੈ ਕਿ ਬਾਣੀ ਹੀ ਨਾਮ ਹੈ। ਨਾਮ ਕੋਈ ਵੱਖਰੀ ਚੀਜ਼ ਨਹੀਂ। ਇਹਨਾਂ ਨੇ ਨਾ ਕਦੇ ਨਾਮ ਜਪਿਆ ਹੈ, ਨਾ ਹੀ ਕਦੇ ਵਿਚਾਰ ਕੇ ਬਾਣੀ ਪੜ੍ਹੀ ਹੈ। ਬਾਣੀ ਦੱਸ ਰਹੀ ਹੈ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਨਾਮ ਪਾਇੰਦਾ ਅੰਗ 1066 ਇਹ ਬਾਣੀ ਜੋ ਜੀ ਉਹ ਜਾਣੇ ਤਿਸ ਅੰਤਰ ਰਵੈ ਹਰਨਾਮਾ ਇਸੇ ਵਿਸ਼ੇ ਦੇ ਹਵਾਲੇ ਪਹਿਲਾਂ ਦਿੱਤੇ ਜਾ ਚੁੱਕੇ ਹਨ ਗੁਰੂ ਸਾਹਿਬਾਨ ਦੇ ਹਕੂਨਾ ਮੇ ਦੀ ਕਿਤਾਬ ਜੋ ਡਾਕਟਰ ਗੰਢਾ ਸਿੰਘ ਜੀ ਨੇ ਸੰਪਾਦਿਤ ਕੀਤੀ ਸੀ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ ਗਈ ਹੈ ਇਸ ਵਿੱਚ ਸਾਰੇ ਗੁਰੂ ਸਾਹਿਬਾਨ ਨੇ ਹਰ ਇੱਕ ਹੁਕਮਨਾਮੇ ਵਿੱਚ ਜੋ ਪਹਿਲੀ ਗੱਲ ਲਿਖੀ ਹੈ ਉਹ ਹੈ ਗੁਰੂ ਗੁਰੂ ਜਪਨਾ ਜਨਮ ਸਵਰਗ ਕਾਮਰੇਡਾਂ ਦੇ ਪੰਥ ਵਿੱਚ ਕੁਛ ਪੜ੍ਹਤ ਕਰਨ ਤੋਂ ਪਹਿਲਾਂ ਕਿਸੇ ਵੀ ਗੁਰਸ਼ਿਕਨੀ ਵਾਹਿਗੁਰੂ ਮੰਤਰ ਤੇ ਜਾਪ ਤੇ ਨਾ ਲਿਖਤੀ ਰੂਪ ਵਿੱਚ ਕਿਸੇ ਨੇ ਇੱਕ ਲਾਈਨ ਲਿਖੀ ਹੈ ਅਤੇ ਨਾ ਹੀ ਜ਼ੁਬਾਨੀ ਕਦੇ ਕਿਸੇ ਨੇ ਕਿਹਾ ਹੈ ਇਹ ਸਭ ਕਾਢਾ ਸਿੱਖ ਧਰਮ ਨੂੰ ਵਿਗਿਆਨ ਧਰਮ ਕਹਿਣ ਵਾਲਿਆਂ ਦੀਆਂ ਹਨ ਮੇਰੇ ਮਨ ਮੁਖ ਹਰ ਹਰ ਬੋਲੀ ਹੈ ਨਾਲ ਹੀ ਦੱਸਿਆ ਹੈ ਕਿ ਨਾਮ ਲੈ ਤ ਪ੍ਰਭ ਕਹਿ ਸਬਾਸ ਪਿਛਲੀ ਸ਼ਦੀ ਦੇ ਖਾਲਸਾ ਪੰਥ ਵਿੱਚ ਸਰਵ ਪ੍ਰਮਾਣਿਤ ਪਦਮ ਪੂਸ਼ਨ ਡਾਕਟਰ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਵਿੱਚ ਇਸ ਵਿਸ਼ੇ ਤੇ ਬਹੁਤ ਚੰਨ ਪਾਇਆ ਗਿਆ ਹੈ ਭਾਈ ਸਾਹਿਬ ਦਾ ਕਹਿਣਾ ਹੈ ਕਿ ਬਾਣੀ ਗੁਰਦੇਵ ਮਾਤਾ ਦੀ ਨਿੱਗੀ ਗੋਦ ਹੈ ਬੱਚੇ ਨੂੰ ਜੋ ਮਰਜੀ ਦੇਵੋ ਪਰ ਜੋ ਆਨੰਦ ਮਾਤਾ ਦੀ ਗੋਦੀ ਵਿੱਚੋਂ ਮਿਲਦਾ ਹੈ ਉਹ ਹੋਰ ਕਿਤੇ ਨਹੀਂ ਮਿਲਦਾ ਨਾਮ ਗੁਰਦੇਵ ਪਿਤਾ ਦੀ ਉਂਗਲ ਹੈ ਬੱਚਾ ਬਾਪ ਦੀ ਉਂਗਲ ਫੜ ਕੇ ਸਾਰਾ ਮੇਲਾ ਦੇਖ ਕੇ ਆ ਜਾਂਦਾ ਹੈ ਤੇ ਜਦ ਉਂਗਲ ਛੁੱਟ ਜਾਵੇ ਮੇਲੇ ਵਿੱਚ ਗਵਾਚ ਕੇ ਦੁੱਖ ਪਾਉਂਦਾ ਹੈ ਰੁਪਏ ਦੇ ਇੱਕ ਪਾਸੇ ਸ਼ੇਰ ਦੀ ਮੂਰਤ ਹੈ ਦੂਸਰੇ ਪਾਸੇ 1 ਰੁਪਇਆ ਲਿਖਿਆ ਹੁੰਦਾ ਹੈਡ ਟੇਲ ਦੋਨੋਂ ਨਿਸ਼ਾਨਾਂ ਨਾਲ ਨਿਸ਼ਾਨਾਂ ਨਾਲ ਰੁਪਇਆ ਬਣਦਾ ਹੈ ਇਸ ਲਈ ਨਾਮ ਤੇ ਬਾਣੀ ਸਿੱਖ ਦੀ ਜਿੰਦ ਜਾਨ ਹਨ ਦੂਸਰਾ ਵਿਚਾਰ ਹੈ ਕਿ ਬਾਣੀ ਸਿਰਫ ਪੜਿਆ ਹੋਇਆ ਹੀ ਪੜ ਸਕਦਾ ਹੈ ਤੇ ਫਿਰ ਅਨਪੜ ਕੀ ਕਰੇ ਪਰ ਗੁਰਬਾਣੀ ਦੱਸ ਰਹੀ ਹੈ ਜੋ ਪ੍ਰਾਣੀ ਹਰ ਨਾਮ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ ਪਰ ਵਿਗਿਆਨਕ ਦੇ ਪਾਸ਼ਿਕ ਸਿੱਖੀ ਪੇ ਇਸ ਵਿੱਚ ਕਾਮਰੇਡ ਕਦੇ ਨਹੀਂ ਮੰਨਣਗੇ ਅਤੇ ਹੁਣ ਇਹਨਾਂ ਵੱਲੋਂ ਹੁਣ ਪ੍ਰਚਾਰਿਆ ਜਾ ਰਿਹਾ ਹੈ ਕਿ ਰਸਨਾ ਦੇ ਜਾਪ ਕਰਨ ਨਾਲ ਮੂੰਹ ਵਿੰਗਾ ਹੋ ਜਾਵੇਗਾ अथवा ਲਖਵਾ ਮਾਰ ਜਾਵੇਗਾ ਅਤੇ ਇਹ ਬ੍ਰਾਹਮਣਵਾਦੀ ਕੰਮ ਹੈ